पागल पा जमा गल ਅਤੇ ਪੈ ਜਮਾ ਗਲ ਜਿਸ ਬੰਦੇ ਨੂੰ ਆਪਣਾ ਆਪਣੇ ਆਪ ਦਾ ਅਹਿਸਾਸ ਨਾ ਹੋਵੇ ਕਿ ਮੈਂ ਕੌਣ ਹਾਂ ਆਪਣੇ ਹਾਨ ਲਾਭ ਦਾ ਪਤਾ ਨਾ ਹੋਵੇ ਮਿੱਤਰ ਅਤੇ ਦੁਸ਼ਮਣ ਦੀ ਪਹਿਚਾਨ ਨਾ ਹੋਵੇ ਦੁੱਖ ਸੁੱਖ ਦੇ ਫਰਕ ਦਾ ਪਤਾ ਨਾ ਹੋਵੇ ਜ਼ਿੰਦਗੀ ਦੇ ਮਨੋਰਥ ਦੀ ਸਮਝ ਨਾ ਹੋਵੇ ਅਤੇ ਕਿਸੇ ਨਿਜਮ ਦਾ ਵੱੱਜਾ ਨਾ ਹੋਵੇ ਸੰਸਾਰੀ ਭਾਸ਼ਾ ਵਿੱਚ ਉਹ ਪਾਗਲ ਕਿਹਾ ਜਾਂਦਾ ਹੈ ਅਜਿਹੇ ਬੰਦੇ ਨਾਲ ਜੇ ਗੱਲ ਕਰੀਏ ਉਹ ਆਪਣੇ ਆਪ ਨੂੰ ਸਭ ਤੋਂ ਸਮਝਦਾਰ ਅਤੇ ਸਾਰੀ ਦੁਨੀਆ ਨੂੰ ਪਾਗਲ ਸਮਝਦਾ ਹੈ ਭਲੇ ਬੁਰੇ ਦੀ ਪਹਿਚਾਣ ਨਾ ਹੋਣ ਕਾਰਨ ਜੋ ਸਾਹਮਣੇ ਆਵੇ ਉਸ ਨੂੰ ਵੱਟੇ ਮਾਰਦਾ ਹੈ ਅਤੇ ਗਾਲਾਂ ਕੱਢਦਾ ਹੈ ਸਮਝਦਾਰ ਬੰਦੇ ਉਹਦੇ ਸਾਹਮਣੇ ਨਹੀਂ ਹੁੰਦੇ ਜੇ ਸਾਹਮਣੇ ਆ ਜਾਵੇ ਤਾਂ ਪਾਸਾ ਵੱਟ ਕੇ ਨਿਕਲ ਜਾਂਦੇ ਹਨ ਦੂਸਰਾ ਵਰਗ ਸੰਸਾਰ ਦੇ ਮਹਾਨ ਚਿੰਤਕ ਕਲਾਕਾਰ ਕਵੀ ਅਤੇ ਸਾਇੰਸ ਦਾ ਦਾ ਹੁੰਦਾ ਹੈ ਰਹਿਣੀ ਬਹਿਣੀ ਨਾ ਦੀ ਬੀ ਜਿਆਦਾ ਫਕਰਾਂ ਵਾਲੀ ਦੁਨੀਆ ਤੋਂ ਬੇਪਰਵਾਹ ਦੁਨੀਆਵੀ ਹਾਨ ਲਾਭ ਤੋਂ ਪਰੇ ਕਈ ਵਾਰ ਸਮਾਜਿਕ ਮੰਨਤੋਂ ਵੀ ਮੁਕਤ ਤੇ ਹਮੇਸ਼ਾ ਲਈ ਆਪਣੀ ਧਨ ਵਿੱਚ ਮਸਤ ਰਹਿੰਦੇ ਹਨ ਮਿਰਜ਼ਾ ਗੱਲਵੰਗ ਤੌਰ ਤੇ ਇਹਨਾਂ ਪਾਗਲ ਹੀ ਸਮਝਦੀ ਹੈ ਪਰ ਮਰਨ ਪਿੱਛੋਂ ਦੁਨੀਆ ਇਹਨਾਂ ਨੂੰ ਯਾਦ ਕਰਦੀ ਹੈ ਇਹਨਾਂ ਦੇ ਮਕਬਰੇ ਜਾਂ ਹੋਰ ਯਾਦਗਾਰ ਬਣਾ ਕੇ ਹਰ ਸਾਲ ਇਹਨਾਂ ਨੂੰ ਯਾਦ ਕਰਦੀ ਹੈ ਇੰਗਲੈਂਡ ਦਾ ਮਹਾਨ ਸਾਇੰਸਦਾਨ ਮਿਸਟਰ ਫੈਰਾਡੇ ਜਿਸ ਨੇ ਫੈਰਾਡੇਜ਼ ਲਾਅ ਆਫ ਇਲੈਕਟ੍ਰੋਮੈਗਨੇਟਿਕ ਇੰਡਕਸ਼ਨ ਦੇ ਅਸੂਲ ਲੱਭ ਕੇ ਸੰਸਾਰ ਵਿੱਚ ਬਿਜਲੀ ਦੀ ਕ੍ਰਾਂਤੀ ਲਿਆਂਦੀ 12 ਸਾਲ ਚੁੰਬਕ ਦਾ ਇੱਕ ਟੁਕੜਾ ਹੱਥ ਲੈ ਕੇ ਫਿਰਦਾ ਰਿਹਾ ਤੇ ਖੋਜ ਕਰਦਾ ਰਿਹਾ ਅਖੀਰ ਜਦ ਉਸਨੇ ਖੋਜ ਲੱਭੀ ਕਿ ਤਾਂਬੇ ਦੀਆਂ ਤਾਰਾਂ ਦੇ ਗੁੱਛੇ ਕੋਇਲ ਵਿੱਚ ਜਦ ਚੁੰਬਕ ਦਾ ਇੱਕ ਟੁਕੜਾ ਆਰਪਾਰ ਕੀਤਾ ਜਾਵੇ ਤਾਂ ਗੁੱਛੇ ਵਿੱਚ ਬਿਜਲੀ ਪੈਦਾ ਹੋ ਜਾਂਦੀ ਹੈ ਫੈਰਾਡੇ ਨੇ ਜਾ ਕੇ ਬਾਦਸ਼ਾਹ ਨੂੰ ਦੱਸਿਆ ਕਿ ਮੈਂ 12 ਸਾਲ ਦੀ ਮਿਹਨਤ ਨਾਲ ਖੋਜ ਕਰਕੇ ਇੱਕ ਚੀਜ਼ ਲੱਭੀ ਹੈ ਅਤੇ ਮੈਂ ਦਰਬਾਰ ਵਿੱਚ ਵਿਖਾਉਣਾ ਚਾਹੁੰਦਾ ਹਾਂ ਤਾਂ ਬਾਦਸ਼ਾਹ ਨੇ ਸਮਨ ਨਿਸ਼ਚਿਤ ਕਰ ਦਿੱਤਾ ਸਾਰੇ ਦਰਬਾਰੀ ਅਮੀਰ ਵਜ਼ੀਰ ਇਕੱਠੇ ਹੋ ਗਏ ਫੈਰਾਡੇ ਨੇ ਆਪਣਾ ਯੰਤਰ ਲੈ ਕੇ ਹਾਜ਼ਰ ਹੋਇਆ ਜਦ ਸਭ ਦੇ ਸਾਹਮਣੇ ਫੈਰਾਡੇ ਨੇ ਤਾਰਾਂ ਦਾ ਕੋਇਲ ਵਿੱਚੋਂ ਚੁੰਬਕ ਦਾ ਟੁਕੜਾ ਅਪਰ ਕੀਤਾ ਤਾਂ ਨਾਲ ਲਗਾਏ ਗਲਵੈਨੋਮੀਟਰ ਦੀ ਸੂਈ ਇੱਕ ਪਾਸੇ ਘੁੰਮ ਗਈ ਸਾਰੇ ਦਰਬਾਰੀ ਹੱਸ ਪਏ ਅਤੇ ਬਾਦਸ਼ਾਹ ਨੂੰ ਕਹਿਣ ਲੱਗੇ ਕਿ ਹਜੂਰ ਇਹ ਪਾਗਲ ਕਿੱਥੋਂ ਆਇਆ ਹੈ ਬਸ ਇੰਨੀ ਗੱਲ ਦਿਖਾਉਣ ਲਈ ਇਸ ਪਾਗਲ ਨੇ ਆਪ ਨੂੰ ਤਕਲੀਫ ਦਿੱਤੀ ਅਤੇ ਸਾਨੂੰ ਬੁਲਾਇਆ ਫਿਰ ਅਡੇ ਕਹਿਣ ਲੱਗਿਆ ਇਹ ਪਾਗਲਪਨ ਨਹੀਂ ਹੈ ਇਸ ਨਾਲ ریاਸਤ ਮਾਲਾ-ਮਾਲ ਹੋ ਜਾਏਗੀ ਲੋਕਾਂ ਦਾ ਰਹਿਣ-ਸਹਿਣ ਬਦਲ ਜਾਏਗਾ ਪਰ ਕਿਸੇ ਨੂੰ ਯਕੀਨ ਨਾ ਆਇਆ ਤੇ ਅੱਜ ਸਾਬਤ ਹੋ ਗਿਆ ਪਾਗਲ ਫੈਰਾਡੇ ਨਹੀਂ ਸੀ ਪਰ ਉਸ ਨੂੰ ਪਾਗਲ ਕਹਿਣ ਵਾਲੇ ਸਨ ਇੱਕ ਹੋਰ ਜਿਹੇ ਬੰਦੇ ਹੁੰਦੇ ਹਨ ਉਹਨਾਂ ਨੂੰ ਆਪਣੇ ਆਪ ਅਤੇ ਜੀਵਨ ਮੂਰਤਤਾ ਪਤਾ ਹੁੰਦਾ ਹੈ ਦੁਨਿਆਵੀ ਦੁਨਿਆਵੀ ਲੋਭ ਲਾਲਚ ਤੋਂ ਉੱਪਰ ਉੱਠ ਕੇ ਪਰਮੇਸ਼ਰ ਦੇ ਰੰਗ ਵਿੱਚ ਵਿਚਰਦੇ ਹਨ ਜਿਨ੍ਹਾਂ ਬਾਬਤ ਗੁਰਬਾਣੀ ਵਿੱਚ ਲਿਖਿਆ ਹੈ ਜਿਨ ਕੋ ਪੂਰਵ ਲਿਖਿਆ ਤਨ ਰਗ ਤਨ ਰੰਗ ਲਗਾ ਨਿਰੰਕਾਰ ਉਨੀ ਛੱਡਿਆ ਮਾਇਆ ਸਵਾਵੜਾ ਤਨ ਸੰਚਿਆ ਨਾਮ ਅਪਾਰ ਅੱਠੇ ਪਹਿਰ ਇੱਕ ਤੈਲਵੇ ਮੰਨੇਨ ਹੁਕਮ ਅਪਾਰ ਅਜੇ ਗੁਰਮੁਖਾ ਦੀ ਸੰਸਾਰ ਦੀ ਵਰਤਨ ਦਾ ਜ਼ਿਕਰ ਇਉ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸੁਨੇ ਅਰਪੈ ਨਹੀਂ ਜਾਕੇ ਕੰਚਨ ਮਾਟੀ ਮੰਨੇ ਰਹਾਉ ਨਾਹ ਨਿੰਦਿਆ ਨੇ ਉਸਤ ਜਾਕੇ ਲੋਭ ਮੋ ਅਪਮਾਨਾ ਹਰ ਕਸੋਗ ਤਿਆ ਰਹੇ ਨਿਆਰੋ ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ ਜਗਤੇ ਰਹੈ ਨਰਾਸਾ ਕਾਮ ਕ੍ਰੋਧ ਜਹ ਪਰਸੈ ਨਾਹਨ ਤਹਿ ਕਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਹ ਨਰਕੋ ਕੀਨੀ ਤਹਿ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜੋ ਪਾਨੀ ਸੰਗ ਪਾਨੀ ਅਜਿਹੇ ਬੰਦੇ ਵੀ ਸੰਸਾਰ ਲਈ ਪਾਗਲ ਹੀ ਹੁੰਦੇ ਹਨ ਕਿਉਂਕਿ ਸੰਸਾਰ ਤੋਂ اٹੰਕ ਰੰਗ ਹੱਸੈ ਰੰਗ ਰੋਵਹ ਚੁੱਪ ਭੀ ਕਰ ਜਾਹੇ ਪ੍ਰਵਾਹ ਨਾਹੀ ਕਿਸਾ ਕੇਰੀ ਬਾਜ ਸਚੈ ਨਾਹ ਉਪਰ ਖਰਚ ਮੰਗਾ ਜੱਬ ਦੇ ਤਖਾਏ ਇਸ ਲਈ ਪਰਮਾਰਥ ਤੋਂ ਕੁੱਥੇ ਮਾਇਆ ਦੀ ਮਾਰ ਖਾ ਕੇ ਪਾਗਲ ਹੋਏ ਬੰਦਿਆਂ ਨੂੰ ਇਹ ਰੱਬੀ ਬੰਦੇ ਪਾਗਲ ਦਿਸਦੇ ਹਨ ਤੀਸਰੇ ਉਹ ਹਨ ਜੋ ਦੇਖਣ ਨੂੰ ਠੀਕ ਲੱਗਦੇ ਹਨ ਖਾਂਦੇ ਪੀਂਦੇ ਹਨ ਸੰਸਾਰੀ ਸੁੱਖ ਧੋਗਦੇ ਹਨ ਪਰ ਪਾਗਲ ਕੁੱਤੇ ਵਾਂਗ ਜਿਹੜਾ ਸਾਹਮਣੇ ਆਇਆ ਉਸ ਨੂੰ ਪਹਿ ਜਾਂਦੇ ਹਨ ਇਹਨਾਂ ਦੀ ਬਿਰਤੀ ਨਾ ਪਾਗਲ ਵਾਲੀ ਨਾ ਪਾ ਜਮਾ ਗਲ ਵਾਲੀ ਨਾ ਪੈ ਪੈ ਘਟਾਓ ਗਲ ਵਾਲੀ ਹੁੰਦੀ ਹੈ ਅਜਿਹੀ ਵਾਲੇ ਸੰਤਾਂ ਦੇ ਕੌਤਕ ਨਾਮੀ ਪੁਸਤਕ ਦੇ ਕਰਤਾ ਨੇ ਭੈਰਨਤੀ ਸਿੰਘ ਜੀ ਦੁਸ਼ਣ ਲਾਇਆ ਕਿ ਉਹ پاگل ਮਾਈ ਦੇ ਪੈਰ ਡਿੱਗਦਾ ਰਿਹਾ ਇਸ ਮਾਈ ਦੀ ਆਤਮਵਸਥਾ ਦਾ ਬਿਆਨ ਭੈਰਨਤੀ ਸਿੰਘ ਜੀ ਨੇ ਜੇਲ ਚਿੱਠੀਆਂ ਪੰਨਾ 76 ਤੋਂ 80 ਤੱਕ ਜੋ ਲਿਖਿਆ ਹੈ ਸੀ ਉਹ ਬਹੁਨ ਅੱਖਰਾਂ ਵਿੱਚ ਦੇ ਰਹੇ ਹਾਂ ਜੋ ਪਾਠਕਾਂ ਨੂੰ ਸਹੀ ਪਤਾ ਚੱਲ ਜਾਏ ਕਿ ਮਾਈ ਗੁਲਾਬ ਕੌਰ پاگل ਸੀ ਜਾਂ ਫਿਰ ਮਾਈ ਨੂੰ ਪਾਗਲ ਕਹਿਣ ਵਾਲਾ ਆਪ ਪਾਗਲ ਅਤੇ ਪੈਗਲ ਵਰਤੀ ਮਾਲਕ ਹੈ ਮਾਈ ਗੁਲਾਬਕੌਰ ਦਾ ਪ੍ਰਸੰਗ ਜੋ ਦਾਸ ਨਿਕ ਸਿੰਘ ਪਾਸ ਸੁਣਿਆ ਸੀ ਇਸ ਮਾਈ ਦਾ ਪਤਾ ਇੱਕ ਬੜਾ ਗੁਰੂ ਕਰਦਾ ਪ੍ਰੇਮੀ ਤੇ ਸ਼ਰਦਾਲੂ ਸੀ ਗੁਰਮੁਖ ਲਾਲ ਨੂੰ ਧਰਮ ਪਤਨੀ ਵੀ ਗੁਰਮੁਖੀ ਮਿਲੀ ਜਿਸ ਦੇ ਪਤੀ ਬ੍ਰਤ ਧਰਮ ਦੇ ਪੂਰਨ ਆਪਣੀ ਮਿਸਾਲ ਆਪ ਹੀ ਰੱਖਦੇ ਹਨ ਪਤੀ ਦੀ ਸੇਵਾ ਤੇ ਆਗਿਆਕਾਰੀ तो बिना ਪਤੀ प्रेम ਵਿੱਚ ਇਥੋਂ ਤਾਈ ਰਤੀ ਹੋਈ ਸੀ ਕਿ ਪਤੀ ਨੂੰ ਸੱਚਮੁੱਚ ਪਰਮੇਸ਼ਰ ਸਮਾਨ ਸਮਾਨ ਸਮਝ ਕੇ ਪੂਜਦੀ ਸੀ। ਅਤੀ ਅਤੇ ਪਤੀ ਦੇ ਦਰਸ਼ਨਾ ਬਾਝੋ ਚੰਦ ਕੁਮੰਦਨੀ ਨਿਆਈ ਇੱਕ ਤਿਲ ਪੀਣਾ ਤੀਰਦੀ ਸੀ। ਪਤੀ ਦੀ ਆਗਿਆ ਅਨੁਸਾਰ ਸ੍ਰੀ ਸੁਖਮਨੀ ਸਾਹਿਬ ਦੇ 52 ਨਖਰੀ ਬਾਣੀਆਂ नाम ਦਾ प्रकाश ਇਹ नहीं ਸੀ ਹੋਇਆ ਕਿ ਕਰਤਾਰ ਭਾਣੇ ਅੰਦਰ ਗੁਰਮੁਖ ਪਤੀ ਹੋਰੀ ਸਚਖੰਡ ਬਸ ਚਲ ਬਸੇ ਪਤੀ ਦੇ ਬਿਰਹ ਦੀ ਚੋਟ ਐਸੀ ਵੱਜੀ ਕਿ ਬਿਰਹ ਚੋਟ ਮਰਨ ਵਾਲੀ ਸਤੀਆਂ ਵਿੱਚੋਂ ਸੱਚਮੁੱਚ ਜਿਉਂਦੀ ਜਾਗਦੀ ਨਾਮ ਕਲਾ ਪ੍ਰਪੂਰ ਸਦਾ ਸੁਹਾਗਣ ਸਤੀ ਬਣ ਗਈ ਤੇ ਅੰਤਰਾਤਮਿਓਂ ਜੋਤ ਪ੍ਰਕਾਸ਼ੀ ਤੇ ਨੂਰ ਦਰਸ ਕਵਲ ਦੀ ਭਵਰੇ ਵੱਤਮਸਤ ਮਾਈ ਹੁਣ ਚੋਜੀ ਗੁਰੂ ਕਰਤਾ ਦੇ ਚਨ ਕਮਲਾਂ ਦੀ ਮੋਜ ਵਾਲੇ ਰੰਗਾਂ ਵਿੱਚ ਮਸਤਲ ਮਸਤ ਹੋ ਗਈ ਅਜੇ ਆਯੂ ਅਵਸਥਾ ਵੀ ਨਵ ਜੋਬਨ ਹੀ ਸੀ ਕਿ ਰਬੀ ਨੂਰ ਵਾਲਾ ਜਗਤ ਮਗਤਾ ਜੋਬਨ ਲਹਿ ਲਹਾ ਕੇ ਚੜ ਗਿਆ ਗੁਰਮਖ ਲਾਲੋ ਲਾਲ ਗੁਲਾਬਕੌਰ ਦੀ ਚਲ ਮਲੰਤੀਆਂ ਲਾਲੀਆਂ ਦੀ ਝਾਲ ਨਾ ਚੱਲੀ ਜਾਵੇ ਇਸੇ ਬ੍ਰਹੋ ਮਸਤੀ ਵਿੱਚ ਝੂਲਦੇ ਹਾਥੀ ਦੀ ਨਿਆਈ ਨਰਪੇ ਪਦਨ ਨੂੰ प्राप्त हो चुकी नवजीवन बालड़ी माई कार बात नरवो हो के चक्रवर्ती हो तुरी प्रेम तणावा अजेहिया कसियां खिंचियां गई हैं कि अथे पैर लोचन तार लग, लगी रहे श्री दी शुद्ध बुध विसर्गी नाम आधार ਵਿੱਚ संतुष्ट चुलले रंगा ਵਿੱਚ लाल गुलाल माई गुलाब कौर दीयां अनेकम ਬਾਜ਼ਾਰ ਉਦਿਆਨ ਉਜਾੜ ਜਿੱਥੇ ਪੀ ਮਸਤ ਰੰਗ ਵਿੱਚ ਵਿਕਸੀ ਮੌਲੀ ਹੋਈ ਮਾਈ ਜਾ ਵਿਚਰੇ ਉੱਥੇ ਹੀ ਗੁਲਜ਼ਾਰ ਬਣ ਗਿਆ ਵੇ ਮਾਈ ਦੀ ਤਾਂ ਹਜ਼ਾਰੇ ਹਰੀਪੁਰ ਦੇ ਇਲਾਕੇ ਵਿੱਚ ਚਾਰ ਚਫੇਰੇ ਪੈ ਗਈ ਰਸ ਪ੍ਰੇਮ ਰੰਗਾਂ ਵਿੱਚ ਬੇਪਰਵਾ ਮਾਈ ਬੋਲਣੋਂ ਕੋਣੂ ਵੀ ਨਹੀਂ ਰਸ ਪ੍ਰੇਮ ਰੰਗਾਂ ਵਿੱਚ ਬੇਪਰਵਾ ਮਾਈ ਪੋਲਣੋਂ ਕੋਣੂ ਪੀ ਰਹੇ ਖੜੋਤੀ ਰੰਗ ਹੱਸੇ ਰੰਗ ਰੋਵੇ ਚੁੱਪ ਪੀ ਕਰ ਜਾਹੇ ਦਿਆ ਚੋਜਾਂ ਵਾਲੀ ਮਸਤ ਮਾਈ ਦੇ ਸਰੀਰ ਦੇ ਬਸਤਰ ਵੀ ਮਸਤਾਨੇ ਹੋ ਗਏ ਉੜਕ ਪਰਮ ਹੰਸ ਮਾਈ ਦਾ ਇੱਕ ਕਾਲਾ ਕੰਬਲ ਤੇ ਕਸ਼ੈਰਾ ਹੀ ਰਹਿ ਗਿਆ ਦਾਸਨੇ ਪਾਸ ਮਾਈ ਦੇ ਦਰਸ਼ਨ ਦੀ ਬਲਾਖਾ ਪ੍ਰਗਟ ਕੀਤੀ ਤਾਂ ਕਹਿਣ ਲੱਗੇ ਜੀ ਉਹ ਤਾਂ ਨੇੜੇ ਕਿਸੇ ਨੂੰ ਆਉਣ ਨਹੀਂ ਦਿੰਦੀ ਦੂਰੋ ਹੀ ਦਰਕਾਰ ਦਿੰਦੀ ਹੈ ਤੇ ਇਟਾਂ ਵੱਟਿਆਂ ਟੀਮਾਂ ਦੀ ਮਾਰ ਮਾਰ ਕੇ ਭਜਾ ਦਿੰਦੀ ਹੈ ਕੋਈ ਡਰਦਾ ਮਾਰਿਆ ਉਸਦੇ ਨੇੜੇ ਨਹੀਂ ਜਾਂਦਾ ਨਾ ਹੀ ਅੱਜ ਤੱਕ ਕਿਸੇ ਨਾਲ ਬੋਲਦੀ ਸੁਣੀ ਹੈ ਆਪਣੇ ਮਤੇ ਵਿੱਚ ਹੀ ਗੰਭੀਰ ਗੁਪਤ ਗੋਸ਼ਟੀ ਉਚਰਨ ਉਚਰਦੀ ਰਹਿੰਦੀ ਹੈ ਉਸ ਦੇ ਨੇੜੇ ਟੁਕਣਾ ਕੋਈ ਮਾੜੀ ਚੀੜੀ ਗੱਲ ਨਹੀਂ ਜੇ ਦੂਰਦਰਸ਼ਨ ਕਰਨਾ ਹੈ ਤਾਂ ਕਰਾ ਲਿਆਉਂਦੇ ਹਾਂ ਜੇ ਆਪਨੇ ਅੱਗੇ ਉਸ ਕੋਲ ਜਾਣਾ ਹੋਇਆ ਤਾਂ ਅਸੀਂ ਪਿੱਛੇ ਮੁੜਾਵਾਂਗੇ ਕਿਉਂਕਿ ਸਾਡਾ ਹੀ ਉਸ ਦੇ ਸਾਹਮਣੇ ਨੇੜੇ ਹੋ ਕੇ ਜਾਣ ਦਾ ਨਹੀਂ ਪੈਂਦਾ ਗੱਲ ਕੇ ਦਾਸ ਉਸ ਨੂੰ ਨਾਲ ਲੈ ਕੇ ਮਾਈ ਦੇ ਪਵਿੱਤਰ ਪਾਵਨ ਦਰਸ਼ਨ ਲਈ ਅਦਾਸਾ ਸੁਧ ਕੇ ਤੁਰ ਪਿਆ ਪਤਾ ਲੱਗ ਕੇ ਮਾਈ ਫਲਾਣੇ ਬਾਜ਼ਾਰ ਵਿੱਚ ਇੱਕ ਬੰਦ ਦੁਕਾਨ ਦੇ ਅੱਗੇ ਕੰਬਲ ਬਿਲੇਟੀ ਪਈ ਬਿਰਾਜਮਾਨ ਹੈ ਦੇ ਸਿੰਘਾਂ ਨੇ ਦਾਸ ਨੂੰ ਖਾਸੀ ਦੂਰੋਂ ਹੀ ਜਿੱਥੇ ਕੋ ਉਸੇ ਬਾਜ਼ਾਰ ਦਾ ਮੋੜ ਮੁੜਦਾ ਸੀ ਸਹਿਣਤ ਮਾਰੀ ਮਾਈ ਨੂੰ ਦਿਖਾਇਆ ਕਿ ਉਹ ਕੰਬਲ ਵਾਲੀਟੀ ਪਈ ਹੈ ਐਸ ਪਾਸੇ ਪਿੱਠ ਹੈ ਤੇ ਪਰਲੇ ਪਾਸੇ ਮੁਖ ਹੈ ਮੁਖ ਵੀ ਕੰਬਲ ਦੇ ਅੰਦਰ ਹੀ ਸੀ ਉਹ ਸਾਰੇ ਤਾਂ ਇਸ਼ਾਰਾ ਕਰਕੇ ਮੁੜ ਨਹੀਂ ਲੱਗੇ ਸਨ ਕਿ ਦਾਸ ਅੱਗੇ ਕਦਮ ਵਧਾਉਣ ਹੀ ਲੱਗਾ ਸੀ ਕਿ ਦੇਵ ਦ੍ਰਿਸ਼ਟੀ ਦੀ ਕਲਾ ਸੰਪੰਨ ਮਾਈ ਪ੍ਰੇਮੀਆਂ ਦਸ ਪ੍ਰੇਮੀਆਂ ਦੀ ਪ੍ਰੇਮ ਦੀ ਜਾਨੂ ਮਾਈ ਇੱਕ ਬਿਜਲੀ ਵਾਂਗ ਤਾਣ ਤਰਮਨਾ ਦਾਸ ਦੀ ਔਰ ਮੁਖਾਰਵੰਦ ਕਰਕੇ ਉੱਠ ਖੜੀ ਹੋਈ ਅਤੇ ਖਲੋ ਕੇ ਦੋਨੋਂ ਹੱਥ ਜੋੜ ਕੇ ਗੱਜ ਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਦਾ ਬਲਾਵਣਾ ਕੀਤਾ ਦਾਸ ਖੁਸ਼ੀਆਂ ਦੀ ਹੱਦ ਨਾ ਰਹੀ ਅਤੇ ਨਾਲ ਦੇ ਸਿੰਘਾਂ ਦੀ ਹੈਰਾਨੀ ਦੀ ਵੀ ਹੱਦ ਨਾ ਰਹੀ ਇੱਕ ਦੋ ਪ੍ਰੇਮੀ ਸਜਣਤਾ ਮੇਰੇ ਨਾਲ ਤੁਰਤਾ ਹੀ ਆਣ ਹੀ ਪੁੱਜੇ ਮਾਈ ਆਪਣੀ ਪ੍ਰੀਮ ਲਟਕ ਦੀ ਮੋਜ ਵਿੱਚ ਉਸੇ ਤਰ੍ਹਾਂ ਹੱਥ ਜੋੜੀ ਖੜੀ ਸੀ ਕਿ ਦਾਸ ਦੇ ਜਾਨ ਸਰ ਦੀ ਕੀਤੀ ਪਰੰਤੂ ਦਾਸ ਦਾ ਸੀਸ ਮਾਈ ਨੇ ਆਪਣੇ ਹਸਤ ਕੰਮ ਲਾਵੇ ਜਿ ਲਿਆ ਅਤੇ ਆਪਣੇ ਉੱਪਰਲਾ ਕੰਬਲ ਲਾ ਕੇ ਦੇ ਹੀਠਾ ਵਿਛਾਉਣਾ ਵਿਛਾਉਣੀ ਸਨ ਕਿ ਦਾਸ ਨੇ ਮਾਈ ਹੋਰਾਂ ਅੱਗੇ ਭੂਤ ਹੋ ਕੇ ਬੇਨਤੀ ਕੀਤੀ ਕਿ ਇਤਨੀ ਚਾਲ ਚੱਲਣ ਜੋਗਾ ਇਹ ਦਰਸ ਪਖਾਰੀ ਨਹੀਂ ਧੋੜਾਂ ਵਿੱਚ ਲਟਣ ਵਾਲਾ ਹੈ ਇਹ ਕਹਿ ਕੇ ਦਾਸ ਪੁੰਜੇ ਹੀ ਬੈਠ ਗਿਆ ਤੇ ਕੰਬਲ ਉਸ ਦੇ ਕੋਲ ਹੀ ਪਿਆ ਰਹਾ ਅਤੇ ਆਪ ਇੱਕ ਲਿਵ ਹੀ ਲਹਿਰ ਤੇ ਲਟਕ ਵਿੱਚ ਨਿਮਗਨ ਹੋ ਕੇ ਬੈਠ ਗਏ ਜਿਵੇਂ ਮੋਜ ਕ੍ਰਿਸ਼ਮੇ ਵਾਲੀ ਬੈਠਣੀ ਮਾਈ ਹੋਰਾਂ ਉਸ ਵੇਲੇ ਬੈਠੇ ਸਨ ਉਸ ਦਾ ਹੂਬੂ ਫੋਟੋ ਦਾਸ ਦੇ ਹਿਰਦੇ ਉੱਪਰ ਹੁਣ ਤਾਈ ਖਿੱਚਿਆ ਪਿਆ ਹੈ ਮੇਰੇ ਮਨ ਤਨ ਹੀਰੇ ਨੂੰ ਠਾਰ ਦੇਣ ਵਾਲਾ ਉਹ ਕੌਤਕੀ ਕ੍ਰਿਸ਼ਮਾ ਅੱਖਰਾਂ ਵਿੱਚ ਉਕਰਿਆ ਜਾਣਾ ਅਤ ਸੰਭਵ ਹੈ ਮੈਂ ਪੇਖ ਤੀ ਪੁਨੇਤ ਪਨੀਤ ਹੋ ਗਿਆ ਅਤੇ ਦਰਸਪੇਟ ਹੁਣਸਾਰ ਹੀ ਨਾਮ ਦਾ ਖੰਡਾ ਜੂਰੂ ਜੂਰ ਖੜਕਣ ਲੱਗ ਪਿਆ ਮੀਨੂ ਮਾਈ ਦੀਆਂ ਗੋਜ ਆਤਮ ਤੇਜਮਈ ਸਹਿਣਤਾ ਮੇਰੇ ਨਾਲ ਗੂੜ ਗਿਆਨ ਗੋਸ਼ਟ ਕਰਦੀਆਂ ਦਿਸਣ ਦਾਸ ਤੇ ਉਹਨਾਂ ਦੇ ਅੰਦਰ ਦੀ ਗੋਜ ਕਥਾ ਇੱਕਮਿਕ ਹੋ ਗਈ ਮੂੰਹੋਂ ਬੋਲਣ ਦੀ ਹੁਣ ਕਿਸ ਨੂੰ ਲੋੜ ਮਾਈ ਜੀ ਇਸ ਬੁੱਧ ਇਸ ਵਿਦ ਮਧੁਰ ਬਚਨ ਬੋਲ ਕੇ ਦਾਸਤੀ ਹੋਏ ਮੁਸਾਫਰ ਹਾਂ ਪਰਹੁਣਚਾਰੀ ਕੀ ਕਰਾਂ ਮੁਸਾਫਰ ਹਾਂ ਮੁਸਾਫਰ ਹਾਂ ਇਵੇਂ ਜਿਵੇਂ ਪ੍ਰੀਮ ਬੇਰਗਣੀ ਮਧਰ ਤੁਨੀ ਦੇ ਮੁਖਾਰਬੇੰ ਤੋਂ ਨਿਕਲਦੀ ਰਹੀ ਫੇਰ ਹੰਬੜਾ ਮਾਰ ਕੇ ਉੱਠੇ ਕੰਬਲ ਚੁੱਕਿਆ ਤੇ ਦਾਸ ਨੂੰ ਉੱਥੇ ਹੀ ਬੈਠੇ ਰਹਿਣ ਦਾ ਇਸ਼ਾਰਾ ਕਰਕੇ ਚੁੰਮਦੇ ਮੌਲ ਦੇ ਕੁਫਲਾਂ ਵਾਲੇ ਦੀ ਦੁਕਾਨ ਉੱਤੇ ਜਾ ਫਰੇ ਅਤੇ ਉਸ ਦੇ ਭੋਜਨ ਟੋਕਰੇ ਆਦਿ ਵਿੱਚੋਂ ਦੀ ਝੋਲੀ ਪਰ ਲਿਆਂਦੀ ਤੇ ਦਾਸ ਉੱਤੇ ਟੁੱਟ ਕੇ ਆਖਣ ਲੱਗੇ ਵਿਵੇਕੀਆਂ ਦਾ ਪ੍ਰਸ਼ਾਦ ਹੈ ਪ੍ਰਵਾਨ ਕਰੋ ਦਾਸ ਨੇ ਧੰਨ ਭਗ ਕੇ ਸੰਤ ਪ੍ਰਸ਼ਾਦ ਜਾਣ ਕੇ ਮਾਈ ਜੀ ਦੇ ਪ੍ਰੇਮ ਨੂੰ ਪ੍ਰਸ਼ਾਦ ਨੂੰ ਪੱਲੇ ਪਵਾ ਲਿਆ ਤੇ ਲੜ ਬਨ ਲਿਆ ਫਿਰ ਦਾਸ ਵੱਲ ਵੇਖ ਵਿਗਸ ਕੇ ਨਿਹਾਲ ਨਿਹਾਲ ਦਾ ਖੁਸ਼ਾ ਬਖਸ਼ਿਆ ਅਤਿ ਉਪ ਭਾਕਿਆ ਗੁਰੂ ਕੇ ਸਿਖਾ ਤੂੰ ਨਿਹਾਲ ਹੋਇਓ ਸੋਨਾ ਦੀਵਾ ਸਤਿਗੁਰ ਨੇ ਜਗਾਇਆ ਹੈ ਇਓ ਕਹਿ ਕੇ ਬਸਮਾ ਰੰਗਾਂ ਵਿੱਚ ਰੰਗੀਜ ਕੇ ਊਠ ਟੂਠਣੀ kraant ਵਿੱਚ ਉਠੇ ਦਾਸ ਨੇ ਬਿਨੇ ਅਲਾਈ ਕੇ ਕਿਰਪਾ ਕਰਕੇ ਸਿਸੜੀ ਦੇਵੋ ਕੇ ਇਹ ਦੀਵਾ ਇਵੇਂ ਜਿਵੇਂ ਜਗਦਾ ਰਹੇ ਬਚਨ ਹੋਇਆ ਇਹ ਜਗਮਗੀ ਜੋਤ ਘਟ ਅੰਤਰੀ ਨਾਮ ਦੀਵਾ ਹੋਰ ਵੀ ਲਟ ਲਟ ਜਗੂ ਇਹ ਅਮੋਗ ਰੁਪੀ ਬਾਣ ਵਾਹ ਕੇ ਉਹ ਖੜੇ ਖੜੇ ਹੀ ਫਿਰ ਪ੍ਰੇਮ ਵਿੱਚ ਨਮਗਨ ਹੋ ਗਏ ਅੱਖ ਉਗੜੀ ਤਾਂ ਵਿਦਾਇਗੀ ਦਾ ਇਸ਼ਾਰਾ ਹੋਇਆ ਦਾਸ ਨੇ ਜੋੜੜੀ ਕੀਤੀ ਫਿਰ ਦਰਸ਼ਨ ਮੇਲੇ ਕਦੋਂ ਹੋਣਗੇ ਵਿਚਾਰਨ ਹੋਇਆ ਕਿ ਅੰਤਰਾਤਮੇ ਮਿਲ ਰਹੇ ਸ਼ਬਦ ਮੇਲੀਆਂ ਦਾ ਸਦਾ ਹੀ ਮੇਲ ਬਣਿਆ ਹੋਇਆ ਹੈ ਵਿਛੋੜਾ ਕਦੇ ਨਹੀਂ ਉਂਝ ਪਰਸਪਰ ਸੰਮੁਖੀ ਦਰਸ਼ਨਦਾਰੇ ਤਾਂ ਹੁਣ ਤੁਰ ਦਰਗਾਹੀ ਹੋਣਗੇ ਅਤੇ ਬਚਨ ਹੋਇਆ ਕਿ ਅਸੀਸ ਹੋਈ ਹਕਮ ਕੰਡ ਪਟਨ ਦੇ ਪ੍ਰਵਾਹ ਚਲਾਉਣ ਦਾ हो जाओ ਤੁਰੇ ਹੋ ਜਾਓ ਦੇਸਾਂ ਨੂੰ ਪਾਣੇ ਅੰਦਰ ਆਨੰਦ ਮਾਣੋ ਤੇ ਪੰਜੇ ਸੇਵ ਦੀ ਦਰਸ਼ਨ ਯਾਤਰਾ ਕਰਦੇ ਜਾਓ ਇਸ ਪ੍ਰਕਾਰ ਦੇ ਗਿਣਵੇਂ ਬਣਵੇਂ ਬਚਨ ਹੋਏ ਦਾਸ ਚਰਨਾ ਤੇ ਟੈਪਿਆ ਉਹ ਨੇਤਰਾਂ ਵਿੱਚ ਪ੍ਰੀਮ ਵੇਰਾ ਨਾਲ ਜਲ ਭਰ ਲਿਆ ਏ ਦਾਸ ਦੇ ਦੀਦੇ ਵੀ ਜਲਪੂਰਤ ਇਹ ਆਦਮ ਉਹ ਵਸਤਾ ਮਈ ਗੁਲਾਬਕੌਰ ਦੀ ਹੈ ਜਿਸ ਨੂੰ ਸੰਤਾਂ ਦੇ ਕੌਤਕ ਦੇ ਲਿਖਾਰੀ ਕਾਮਰੇਡ ਸਵਰਾ ਪਾਗਲ ਆਖਦਾ ਹੈ ਪਾਠਕ ਖੁਦ ਅੰਦਾਜ਼ਾ ਲੈਣ ਕਿ ਗੁਰਮੁਖ ਮਈ ਪਾਗਲ ਹੈ ਜਾਂ ਸਵਰਾ ਤੇਂਦਰ ਸਿੰਘ ਕਗਾ ਸਮੇਤ ਇਹ ਸਾਰੀ ਜੁੰਡਲੀ ਮੂਰਖ ਤੇ ਪਗਲਾਂ ਟੋਲਾ ਇਕੱਠਾ ਹੋਇਆ ਹੈ ਇਸੇ ਤਰ੍ਹਾਂ ਸੰਤਾਂ ਦੇ ਕੌਤਕ ਦੇ ਕਰਤਾ ਨੇ ਭਾਈ ਸਾਹਿਬ ਅਨੰਤਿਧ ਸਿੰਘ ਜੀ ਤੇ ਹੋਰ ਦੂਸ਼ਣ ਲਾਏ ਹਨ ਕਿ ਭਾਈ ਸਾਹਿਬ ਲੋਹੇ ਦੇ ਪਾਂਡੇ ਵਿੱਚ ਪ੍ਰਸ਼ਾਦਾ ਛਕਦੇ ਸੀ ਅਤੇ ਬੀਬੀਆਂ ਦੀ ਕੇਸਕੀ ਦੀ ਨਵੀਂ ਰੀਤ ਤੋੜ ਦਿੱਤੀ ਜਿਸ ਬੰਦੇ ਨੂੰ ਸਿੱਖੀ थोड़ी बहुत भी ਵੀ है ਹੈ ਉਸ ਨੂੰ ਪਤਾ ਹੋਵੇਗਾ संताली तो ਤੋਂ सारे ਸਾਰੇ ਗੁਰਦੁਆਰਿਆਂ ਵਿੱਚ ਸਰਬ ਲੋਹਾਂ ਦੀ ਦੇਗਾ ਲੰਗਰ ਸਜਾਉਣ ਲਈ ਹੁੰਦੀਆਂ ਸਨ ਤੇ ਸਰਬ ਲੋਹ ਦੇ ਬਾਟੇ ਹੀ ਪਾਣੀ ਪੀਣ ਛਕਣ ਲਈ ਵੰਡੇ ਜਾਂਦੇ ਸਨ ਇਨ੍ਹਾਂ ਬਾਟੇ ਵਿੱਚ ਲੰਗਰ ਤਿਆਰ ਕਰਨ ਅਤੇ ਛਕਣ ਦਾ ਫਾਇਦਾ ਡਾਕਟਰ ਵਦੇਰੀ ਦੱਸ ਸਕਦੇ ਹਨ ਕਿ ਲੋਹ ਇਸ ਵਿੱਚ ਮਿਲਣ ਕਰਕੇ ਇਸ ਦਾ ਰੰਗ ਕਾਲਾ ਹੋ ਜਾਂਦਾ ਹੈ ਨਾਲ ਹੀ ਸਰਬਲੋਹ ਦੇ ਭਾਂਡਿਆਂ ਨੂੰ ਜੰਗਾਲ ਤੋਂ ਬਚਾਉਣ ਲਈ ਸੁੱਕ ਮਾਂਜ ਕਰਨ ਦੀ ਮੁਸ਼ਕਲ ਜ਼ਿਆਦਾ ਕਰਨੀ ਪੈਂਦੀ ਸੀ ਇਸੇ ਲਈ ਐਲੂਮੀਨੀਅਮ ਦੇ ਬਾਜ਼ਾਰ ਵਿੱਚ ਆਉਣ ਕਾਰਨ ਇੱਕ ਸਸਤੇ ਦੂਸਰੇ ਸਫਾਈ ਪੱਖੋਂ ਇਹਨਾਂ ਨੂੰ ਪਨਾਇਆ ਗਿਆ ਸਵਰਾਂ ਨੂੰ ਇਹ ਭਾਂਡੇ ਮੁਆਫਕ ਨਹੀਂ ਇੰਗਲੈਂਡ ਵਿੱਚ ਕਈ ਥਾਂ ਹੁਣ ਸਰਬਲੋਹ ਰੌਟ ਆਇਰਨ ਦੇ ਭਾਂਡੇ ਵਰਤਨੇ ਸ਼ੁਰੂ ਹੋ ਗਏ ਹਨ ਅਤੇ ਨਿੰਗ ਸਿੰਘਾਂ ਦੀ ਸਾਰੇ ਜਿੱਥੇ ਹੁਣ ਤੱਕ ਸਰਬਲੋਹ ਦੇ ਭਾਂਡੇ ਵਰਤ ਰਹੀਆਂ ਹਨ ਇਥੋਂ ਤੱਕ ਬੀਬੀਆਂ ਦੀ ਕੇਸਕੀ ਦੀ ਗੱਲ ਹੈ ਪ੍ਰਾਤਨ ਸਮੇਂ ਵਿੱਚ ਸਿੱਖ ਬੀਬੀਆਂ ਕੇਸ ਕੀ ਸਜਾਉਂਦੀਆਂ ਹਨ ਆਜਾਇਬ ਘਰਾਂ ਵਿੱਚ ਪ੍ਰਾਤਨ ਸਿੰਘ ਦੀਆਂ ਲੱਗੀਆਂ ਫੋਟੋ ਇਸ ਦੀ ਪੁਸ਼ਟੀ ਕਰ ਰਹੀਆਂ ਹਨ ਅੰਗਰੇਜ਼ ਇਤਿਹਾਸਕਾਰ ਜੋਸਫ ਡੇਵਿਡ ਕ੍ਰਿੰਗਮ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ ਬਾਕੀ ਦੇਸ਼ ਵਾਸੀ ਇਸ ਤਰ੍ਹਾਂ ਸਿੱਖ ਬੀਬੀਆਂ ਦੀ ਪਹਿਚਾਣ ਸਿਰ ਤੇ ਕੇਸ ਕਰਕੇ ਵੱਖਰੀ ਹੈ ਸਿੰਘ ਸਭਾ ਲਹਿਰ ਵੇਲੇ ਬੀਬੀਆਂ ਦੀ ਵਿੱਦਿਆ ਲਈ ਚਾਰ ਸਕੂਲ ਖੋਲੇ ਗਏ ਸੀ ਕੈਰੋਂ ਅੰਮ੍ਰਿਤਸਰ ਜਿਸਪਾਲੋਂ ਲੁਧਿਆਣਾ ਮਾਕਰਨੀਆ ਵਿਦਿਆਲਾ ਫਿਰੋਜ਼ਪੁਰ ਤੇ ਸ਼ਦਮੰਖ ਖੁਰਦ ਲੁਧਿਆਣਾ ਇਨ੍ਹਾਂ ਸਾਰਿਆਂ ਸਕੂਲਾਂ ਵਿੱਚ ਸਿੱਖ ਬੱਚੀਆਂ ਲਈ ਕੇਸ ਕੀ ਸਜਾਉਣਾ ਲਾਜ਼ਮੀ ਸੀ ਨਿਹੰਗ ਸਿੰਘਾਂ ਦੀਆਂ ਸਾਰੀਆਂ ਸਿੰਘਣੀਆਂ ਕੇਸ ਸਜਾਉਂਦੀਆਂ ਹਨ ਰਹਿਤਨਾਮੇ ਵਿੱਚ ਕੇਸ ਸਜਾਉਣ ਲਈ ਦਰਦ ਹੈ ਭਗਤ ਪੂਰਨ ਸਿੰਘ ਜੀ ਵੱਲੋਂ ਲਿਖਿਆ ਸਿੱਖ ਬੀਬੀਆਂ ਦਾ ਪਹਿਰਾਵਾ ਵਿੱਚ ਕੇਸ ਦੇ ਫਾਇਦੇ ਲਿਖੇ ਹਨ ਰਹਿਤ ਮਰਾਦਾ ਖਰੜਾ ਤਿਆਰ ਕਰਨ ਵਾਲੇ ਅਧਿਕਾਰਾਂਸ ਮਾਡਰਨ ਖਿਆਲਾਂ ਦੇ ਸੀ ਇਸੇ ਲਈ ਲਿਖ ਦਿੱਤਾ ਗਿਆ ਕਿ ਸਿੱਖ ਬੀਬੀ ਦਸਤਾਰ ਸਜਾਵੇ ਜਾਂ ਨਾ ਉਹਦੀ ਮਰਜ਼ੀ ਹੈ ਇਸ ਲਈ ਇਹ ਗੱਲ ਦੀ ਖੁਸ਼ੀ ਹੈ ਕਿ ਉਸ ਵੇਲੇ ਬੀਬੀਆਂ ਕਿਸ ਕਿਸ ਜਉਂਦੀਆਂ ਸਨ ਸਿੱਖ ਬੀਬੀਆਂ ਦਾ ਪਹਿਲਾ ਸਿਰ ਦਾ ਜੂڑا ਗਿੱਚੀ ਗਿੱਚੀ ਪਿੱਛੇ ਆ ਗਿਆ ਫਿਰ ਖੁੱਲ ਕੇ ਮਨਮਤੀਆਂ ਵਾਂਗ ਗੁੱਤ ਬਣ ਗਿਆ ਫਿਰ ਸਿਰ ਤੇ ਚੁੰਨੀ ਕਾਇਮ ਸੀ ਪਰ ਹੁਣ ਗੁੱਤ ਵੀ ਗਈ ਚੁੰਨੀ ਵੀ ਉੱਡ ਗਈ ਪੂਤਨੀਆਂ ਵਾਂਗ ਕੇਸ ਖਿਲਾਰ ਕੇ ਸਾਰੇ ਬਾਜ਼ਾਰ ਵਿੱਚ ਘੁੰਮਦੀਆਂ ਹਨ ਸਵਰਾ ਤੇ ਕੱਗੇ ਨੂੰ ਕੋਈ ਸ਼ਰਮ ਨਹੀਂ ਆਉਂਦੀ ਤੇ ਦੂਸ਼ਣ ਭਾਈ ਰਣਜੀਤ ਸਿੰਘ ਦੂਸ਼ਣ ਭਾਈ ਰਣਜੀਤ ਸਿੰਘ ਜੀ ਤੇ ਲਾਉਂਦੇ ਹਨ ਕਿ ਰੀਤ ਤੋਰ ਦਿੱਤੀ ਜਦਕਿ ਮਿਸ਼ਨਰੀ ਕਾਲਜ ਵਿੱਚ अनेका ਬੀਬੀਆਂ ਕੇਸ ਸਜਾ ਕੇ ਰੱਖਦੀਆਂ ਹਨ 3 3 ਇੰਚ ਦੇ ਨੋਹ ਵਧਾ ਕੇ anumatiyan ਵੰਗ ਹੱਥ ਤੇ ਮਹਿੰਦੀ ਵੀ ਲਗਾ ਕੇ ਤੇ ਕੇਸ ਖਲਾਰ ਕੇ ਕਿਹੜੀ ਕੁੜੀ ਲੰਗਰ ਦੀ ਸੇਵਾ ਕਰੇਗੀ ਜਾਂ ਕੋੜੇ ਚੜਕ ਕੇ ਮੈਦਾਨੇ ਜੰਗ ਵਿੱਚ ਸਿੰਘਾਂ ਦਾ ਸਾਥ ਦੇਵੇਗੀ ਇਹ ਸਵਾ ਅਤੇ ਇੰਦਰ ਸਿੰਘ ਘੱਗਾ ਹੀ ਦੱਸ ਸਕਦੇ ਹਨ ਹਰਕੇ ਲੋਗ RAM JAN ਨੀਕੇ ਭਾਗ ਹੀਣ ਨਾ ਸੁਖਾਏ ਜਿਉ ਜੋ ਰਾਮ ਕਹ ਜਨ ਉੱਚੇ ਨਰਨੰਦਕ ਡੰਸ ਲਗਾਏ ਤ੍ਰਿਗ ਤ੍ਰਿਗ ਨਰਨੰਦਕ ਜਿਨ ਜਨਨ ਨਹੀਂ ਭਾਏ ਹਰਕੇ ਸਖਾ ਸਖਾਈ ਸੇ ਹਰਕੇ ਚੋਰ ਵੇ ਮੁਖ ਕਾਲੇ ਜਿਨ ਗੁਰ ਪੈਜ ਨਾ ਪਾਏ